ਦੱਖਣੇ ਮਹੱਲਾ ਪੰਜਵਾਂ ਜਾ ਛੁੱਟੇ ਤਾ ਖਾਕ ਤੋਂ ਸੁਨੀ ਕੰਨ ਨਾ ਜਾਣ ਹੀ ਦੁਰਜਨ ਸੇਤੀ ਨੇਹ ਤੂੰ ਕੈ ਗੁਣ ਹਰ ਰੰਗ ਮਾਣਹੀ ਹਾਂ ਜਾਂ ਛੁੱਟੇ ਤਾਂ ਖਾਕ ਖਿਆਲ ਅੰਦਰੋਂ ਸੋਰ ਛੁੱਟਦੀ ਆ ਨਾ ਸੁੱਤੀ ਪਈ ਜਾਂ ਜਾਗਦੀ ਆ ਜਦ ਹੀ ਖਾਕ ਨਾਲ ਰਲ ਜਾਂਦੀ ਆ ਸ਼ਰੀਰ ਨਾਲ ਰਲ ਜਾਂਦੀ ਖਾਕ ਨਾਲ ਜਾ ਮਿਲਦੀ ਐ ਖਾਕ ਦੀ ਢੇਰੀ ਹੋਈਆਂ ਸ਼ਰੀਰ ਤੇਰ ਕੋ ਜਦ ਛੋਟੇ ਤਾਂ ਖਾਕ ਜੇ ਆਪਰਾ ਖਾ ਲੀਏ ਖਾਕ ਦਾ ਪਾਣੀ ਸਕਦੀ ਖਾਕ ਤੇ ਜਾ ਲੜਦੀ ਐ ਮਿੱਟੀ ਨਾਲ ਲਗਾਇਆ ਨਾ ਜਾ ਲੜਦੀ ਐ ਖਾਕ ਦੀ ਸਾਰ ਮਾਇਆ ਕੜਾ ਜੁੜ ਜਾਂਦੀ ਐ ਜਾ ਕੇ ਤੂੰ ਸਮਝੀ ਗੰਤ ਨਾ ਜਾਣਣੀ ਤੂੰ ਅਸਰਵਾ ਤੇਰੇ ਨੇ ਰਾਇਆ ਗੰਤ ਜ਼ਰੂਰੀ ਜਾਣਦੀ ਅੰਦਰ ਤੇਰੇ ਅੰਦਰ ਤੂੰ ਬਾਹਰ ਨੂੰ ਜਾਗਦੀ ਹੈ ਖਾਕੋਲ ਨੂੰ ਜਾਗਦੀ ਹੈ ਬਾਹਰ ਖਾਕ ਬਿੱਟੀ ਹੈ ਜਿਹਦੇ ਨਾਲ ਤੂੰ ਜਾ ਕੇ ਖਾਦਣਾ ਇੱਕ ਬਿੱਕ ਹੋ ਜਾਂਦੀ ਹੈ ਅੰਦਰ ਤੇਰੇ ਨੇੜੇ ਸੁਝਾ ਹੁੰਦਾ ਹੈ ਅੰਦਰ ਨੇੜਾ ਹੰਤ ਅੰਦਰ ਹੈ ਉਹਨੂੰ ਜਾਣਦੀ ਕੋਈ ਨਹੀਂ ਜਾਣਣ ਦੀ ਕੋਸ਼ਿਸ਼ੇ ਦੀ ਕਰ ਲਈ ਉਹਨੂੰ ਤੂੰ ਕੁਝ ਆਪਦਰ ਹੋਈ ਗਬੀਰ ਲਈ ਕਹਤਾ ਹਨੇਰਾ ਹੋ ਜਾਂਦਾ ਅੰਦਰ ਇਹ ਕਹਿੰਦੇ ਆ ਜੀ ਹੇ ਮੇਰੀ ਕਾਇਆ ਜਦੋਂ ਤੇਰਾ ਤੇ ਇਸ ਜਿੰਦ ਦਾ ਸੰਬੰਧ ਮੁੱਕ ਜਾਏਗਾ ਤਦ ਆ ਤੂੰ ਮਿੱਟੀ ਹੋ ਜਾਏਗੀ ਆਪਾਂ ਜੀਵਨ ਦੀ ਗੱਲ ਕਰ ਰਹੇ ਆ ਮੌਤ ਦੀ ਕਰ ਰਹੇ ਨੋਟ ਕੇ ਮਿੱਟੀ ਹੋ ਜਿੰਦ ਤੋਂ ਸਖਣੀ ਤੂੰ ਖਸਮ ਪ੍ਰਭੂ ਨਾਲ ਸਾਹ ਨਹੀਂ ਪਾ ਸਕेंगी ਉਹ ਚੇਤਨ ਦੀ ਗੱਲ ਚੱਲ ਰਹੀ ਹੈ ਉਪਦੇਸ਼ ਚੇਤਨ ਨੂੰ ਹੋ ਰਿਹਾ ਚੇਤਨ ਨੂੰ ਮਿੱਟੀ ਬਣਾ ਰਹੇ ਨੇ ਇਹਨਾਂ ਦੀ ਅਕਲ ਗਈ ਕਿੱਥੇ ਹੈ ਉਹ ਇੱਥੋਂ ਜਾਣ ਦੀ ਗੱਲ ਕਰ ਰਹੇ ਆ ਆਪਾਂ ਗੱਲ ਕਰ ਰਹੇ ਆ ਜਦੋਂ ਸਰੀਰ ਵਿੱਚ ਜੋਤ ਪ੍ਰਵੇਸ਼ ਕਰਦੀ ਹੈ ਉਹ ਕਹਿੰਦੇ ਆ ਸਰੀਰ ਨੂੰ ਜੋਤ ਛੱਡ ਕੇ ਜਾਂਦੀ ਹੈ ਜੱਦੀ ਗੱਲ ਕਰਦੇ ਆ ਸਰੀਰ ਵਿੱਚ ਪ੍ਰਵੇਸ਼ ਦੀ ਗੱਲ ਕਰਦਾ ਮੈਂ ਕਹਿੰਦਾ ਜਦ ਸੁੱਤਾ ਉੱਠਦਾ ਹੀ ਹੈ ਜਾਗਦਾ ਹੈ ਸੁੱਤਾ ਪਿਆ ਮਰਿਆ ਹੋਇਆ ਹੀ ਹੁੰਦਾ ਜਾਗਦੀ ਸਾਰੇ ਮਿੱਟੀ ਨਾਲ ਰਲ ਜਾਂਦਾ ਤੇਰੇ ਕੋ ਨਹੀਂ ਜਾਂਦੀ ਏ ਸਤ ਸੰਧੀਓ ਅੱਖਾਂ ਨਾਲ ਦੇਖਦੀ ਏ ਕੰਨਾਂ ਮਾਇਆ ਨਾਲ ਜੁੜਦੀ ਤੇ ਦਾਤ ਦਾ ਮਤਲਬ ਹੈ ਜਦੋਂ ਤੂੰ ਨੀਂਦ ਦੇ ਵਿੱਚ ਗ੍ਰਸੀ ਹੋ ਜਾਂਦੀ ਹੈ ਨੀਂਦ ਤੋਂ ਛੁੱਟਦੀ ਹੈ ਬਾਹਰ ਆਉਂਦੀ ਹੈ ਨਾ ਸਰੀਰ ਨਾਲ ਹੈ ਮੈਂ ਰੋਜ਼ ਦੀ ਉਹ ਗੱਲ ਕਰਦਾ ਸਰੀਰ ਦੀ ਕੰਨੇ ਜਨਮ ਦੀ ਨਹੀਂ ਗੱਲ ਕਰਦਾ ਇਹ ਰੋਜ਼ ਇਹਦਾ ਜਮਾਵਲ ਹੁੰਦਾ ਹਾਂਜੀ ਦੁਨਜਨ ਸੇਤੀ ਨੇਹ ਤੂੰ ਕੈ ਗੁਣ ਹਰ ਰੰਗ ਮਾਣਹੀ ਦਰਜਨ ਅਲ ਦੇ ਰਾਮੇ ਇਹੇ ਸਾਖਤ ਹੈ ਉਹਦੇ ਮੇਲ ਬੱਤ ਤੇ ਕੁੱਤੀ ਪੜਾਉਣ ਵਾਲਾ ਕੋਈ ਦਰਜਨ ਮਨੁੱਖ ਉਹਦੇ ਆਸੇ ਰਹਿ ਮੇਲ ਉਹਨੇ ਹੈ ਗਾਇਆ ਵੀ ਦਰਜਨ ਮੇਲ ਗੁਰਮੁਖਨਾਸਾ ਮੇਲ ਹੈ ਉਹ ਦੀ ਗੁਰਮੁਖਨਾ ਘਰ ਮੇ ਬਾਹਰ ਨਹੀਂ ਉਹ ਇਹ ਪੜ੍ਹਾਈ ਬਣਾਉਂਗਾ ਇਹ ਇਹ ਪੜ੍ਹਾਈ ਹੈ ਸਭ ਕੁਝ ਬਾਹਰ ਘਰ ਪੈਣਾ ਨਹੀਂ ਦਰਜਨ ਇਹ ਪੜ੍ਹਾਈ ਪੜ੍ਹਾਈ ਹੈ ਦਰਜਨ ਛੇਤੀ ਨਹੀਂ ਹੋ ਤੂੰ ਕਾਇ ਪੜ੍ਹ ਖਰਲਗ ਵਾਲੀ ਕਿਹੜੇ ਗੋਣੇ ਤੇ ਦਰਜਨ ਤਾਂ ਕੋਈ ਗੁੜੀ ਨਹੀਂ ਹੁੰਦਾ ਫਰਦੇ ਰੰਗ ਕਿਹੜੇ ਗੁੜਲੇ ਤੇ ਰੀਵਾਜ ਮੰਨ ਲਵੇ ਹਰ ਮਤ ਤੇ ਸੁਪਰਕੈਟ ਹੀ ਹੋ ਸਕਦਾ ਹਰ ਅੱਧਰ ਤੂੰ ਜਾਵੇ ਮਿੱਟੀ ਨਾਲ ਖੇਲਦੀ ਮਿੱਟੀ ਰੋਈ ਰਹੇ ਤੂੰ ਸਾਰਾ ਦਿਨ ਦੁਰਜਨ ਦੀ ਪੜ੍ਹਾਈ ਐ ਪਰਮਖਾ ਦੀ ਪੜ੍ਹਾਈ ਐ ਸਾਤਾਂ ਦੀ ਪੜ੍ਹਾਈ ਐ ਇਸ ਕਰਕੇ ਹਰ ਰੰਗ ਨਹੀਂ ਮੰਨਿਆ ਜਾ ਸਕਦਾ ਕਿਸੇ ਵੀ ਮਤ ਦੇ ਫਤਰੂ ਕਿਸੇ ਵੀ ਮਤ ਦਾ ਕੋਈ ਸੰਤ ਹਰ ਰੰਗ ਨਹੀਂ ਮੰਨ ਸਕਦਾ ਕਹਾਵੇ ਤੂੰ ਉੜੀਓ ਬਸੇ ਬੋਲਦਾ ਰਹੇ ਪ੍ਰੈਜ਼ੈਂਟ ਟੈਂਸ ਲੱਗਦਾ ਉਹ ਪਾਸਟ ਟੈਂਸ ਦੀ ਗੱਲ ਨਹੀਂ ਹੈ ਰੋਜ਼ ਦੀ ਗੱਲ ਹੈ ਜੋ ਰੋਜ਼ ਹੋ ਰਿਹਾ ਹੈ ਜੋ ਸੰਗੇ ਉੜਦੀ ਹੈ ਰੋਜ਼ ਦੀ ਗੱਲ ਨੇ ਅਰਥ ਪਾਸਟ ਚਲੋ ਉਹਨਾਂ ਨੂੰ ਕਾ ਬਾਤ ਹੈ ਸਭ ਕੁਝ ਜਿਹਨੂੰ ਫੇਲ ਕਰਨਾ ਹੋਵੇ ਉਹਦਾ ਸਭ ਕੁਝ ਮੈਂ ਖੁਦ ਅਜੇ ਭਲੇਖਾ ਜੀ ਉਹ ਕਹਿੰਦੇ ਤੇਰਾ ਪਿਆਰ ਵਿਚਾਰ ਨਾਲ ਹੈ ਤੋਂ ਕਿਸੇ ਗੁਣ ਦੀ ਬਰਕਤ ਨਾਲ ਹਰੀ ਦਾ ਆਨੰਦ ਮਾਣ ਸਕਦੀ ਹੈ ਇੱਥੇ ਹੁਣ ਉਹਨਾਂ ਨੇ ਪ੍ਰੈਜ਼ੈਂਟ 'ਚ ਗੱਲ ਕਰ ਲਈ ਪਹਿਲਾਂ ਪਾਸਟ ਲੱਗਦੀ ਹੈ ਉਹਨਾਂ ਨੂੰ ਉਹਨਾਂ ਦੇ ਕਾਲਪਨ ਸਾਰੇ ਕਾਲਪਨ ਹਾਂਜੀ ਮਹੱਲਾ ਪੰਜਵਾਂ ਨਾਨਕ ਜਿਸ ਬਿਨ ਕੜੀ ਨਾ ਜੀਵਣਾ ਵਿਸਰੈ ਸਰੈ ਜਿ세 ਹਮਾਰੀ ਚਿੰਦ ਨਾ ਆਨਕ ਨਾ ਜੀਵਨ ਨਾਨਕ ਕਹਿੰਦੇ ਜਿਦੇ ਬਿਨਾ ਇੱਕ ਠੜੀ ਵੀ ਜੀਵਨ ਨਹੀਂ ਚੱਲ ਸਕਦਾ ਇਕ ਠੜੀ ਵੀ ਜੀਵਿਆ ਨਹੀਂ ਜਾ ਸਕਦਾ ਜਿ세 ਦਾ ਸਾਰੇ ਨੰਦ ਉਹਦੇ ਦਸਣ ਨਾਲ ਇੱਕ ਸੈਕਿੰਡ ਜਦ ਹੀ ਮੌਤ ਆਖਰ ਜੀਵਨ ਮਰ ਜਾਊ ਜਿ세 ਦੇ ਸਾਰੇ ਮੌਤ ਹੈ ਤਿਸ ਕਿਉਂ ਕਿਉ ਮਾਣੂ ਤੇ ਸੌਂਕ ਕਿਉਂ ਮਾਨਾ ਹਾਂ ਰੁਸੀਆ ਇਹ ਮਾਨ ਉਹਦੇ ਨਾਲੇ ਰੁਸ ਗਿਆ ਤੂੰ ਤਾਣਾ ਉਹਦੇ ਨਾਲ ਹੀ ਰੁਸੀ ਦਾ ਕਿਸੇ ਅਮਾਰੀ ਚਿੰਦ ਜਿਹਨੂੰ ਸਾਡੀ ਚਿੰਤਾ ਹੈ ਹਰ ਵਕਤ ਉਹਨੂੰ ਤਾਂ ਆਪਣੀ ਚਿੰਤਾ ਹੈ ਤੂੰ ਉਹਦੇ ਬਿਨਾ ਇੱਕ ਦਿਨ ਨਹੀਂ ਆਪਣੋ 살ਣਾ ਇੱਕ ਦਿਨ ਆਪਣੀ ਜੀਵਨ ਉਹਦੇ ਬਿਨਾ ਚੱਲਣਾ ਤੂੰ ਉਹਦੇ ਨਾਲ ਦੁਸਿਆਰ ਤੇ ਕਿਡਾ ਕਰ ਅਗਲ ਵਾਲਿਆਂ ਸਾਰਾ ਸੰਸਾਰ ਇਹ ਤਾਂ ਗਰੀਬ ਇਹ ਸਾਰਾ ਸੰਸਾਰੇ ਪਾਗਲਾਂ ਦਾ ਇਕੱਠਾ ਹੋਇਆ ਹੋਇਆ ਤਾਂ ਗੁਰਖੰਡ ਕੋਰ ਚੋਰ ਆਰਾਮ ਕੋਰਾਂ ਦੀ ਅਟਾ ਅਗੜੀਆਂ ਚ ਵੜਦਾ ਗੁਰੂ ਰਸ ਕਰੇ। ਪਰ ਉਹਨਾਂ ਵਾਲੇ ਚੋਰ ਆਰਾਮ ਕੋਰ ਨੇ। ਉਹ ਤੂਰੇ ਵਿਚਾਰੇ ਅਣਜਾਣ ਨੇ। ਮਹੱਲਾ ਪੰਜਵਾਂ ਰਤੇ ਰੰਗ ਪਾਰ ਬ੍ਰਹਮ ਕੈ। ਮਨ ਤਨ ਅਤ ਗੁਲਾਲ। ਨਾਨਕ ਵਿਣ ਨਾਮੈ ਆਲੂਦਿਆ। ਜਿੱਤੀ ਹੋਰ ਖਿਆਲ। ਜਿਨ੍ਹਾਂ ਨੂੰ ਬਾਹ ਰੰਗ ਦੇ ਰੰਗ ਜਿਹੜੇ ਰੰਗੇ ਗਏ ਜਿਨ੍ਹਾਂ ਨੂੰ ਆਪ ਦਾ ਰੰਗ ਚੜ ਗਿਆ ਮਨਤਨ ਅਤ ਬੁਲਾਲ ਮਾਰ ਕਰਕੇ ਤੰਗ ਕਰਕੇ ਅਤ ਬੁਲਾਲ ਗੂੜਾ ਲਾਲ ਗੂੜੇ ਲਾਲ ਗੂੜਾ ਲਾਲ ਉਹ ਜੀ ਹੋਰ ਕੋਈ ਰੰਗ ਚੜੇ ਨਹੀਂ ਸਕਦਾ ਲਾਲ ਰੰਗ ਨੂੰ ਰੈੱਡ ਵੀ ਹੁੰਦਾ ਰੈੱਡ ਖਾਸ ਤੂਆ ਰੰਗ ਆਇਆ ਹੋਇਆ ਗੁਰਬਾਣੀ ਚ ਲਾਲ ਰੰਗ ਹੁੰਦਾ ਆਤਮਾ ਦਾ ਜੋਤ ਦਾ ਰੰਗ ਲਾਲ ਮੇਰੇ ਲਾਲ ਜੀਓ ਤੇਰਾ ਉਤਰਾ ਨਾ ਜਾਣਾ। ਬਿਨਾਂ ਨਾਮਿਆ ਉਹ ਕਹਿੰਦੇ ਤੇ ਬਿਨਾਂ ਦਾਤੂ ਹਲੂਦਿਆ ਗਿਆ ਜਿਵੇਂ ਲੋਹੇ ਨੂੰ ਜੰਗ ਲੱਗ ਜਾਂਦੀ ਹੈ ਨਾ ਜੰਗ ਖਾ ਜਾਂਦਾ। ਆਕਸੀਜਨ ਆਕਸੀਡਾਈਜ਼ ਹੋ ਕੇ ਲੋਹਾ ਪਾਣੀ ਅ ਆਕਸੀਜਨ ਖਾ ਜਾਂਦੀ ਹੈ ਲੋਹੇ ਨੂੰ ਆ ਹਲੂਦਿਆ ਆ ਲਿਆ ਗਿਆ ਖਾਦਾ ਗਿਆ। ਕਲ ਪਟ ਗਿਆ ਸੜ ਗਿਆ। ਹੋਰ ਖਿਆਲ ਜਿੰਨੇ ਹੋਰ ਖਿਆਲ ਨੇ। ਉਹਨਾਂ ਦਾ ਤੇਰੇ ਅੰਦਰ ਗੱਦਗੀ ਦੇ ਕੈਰਪੈਦਾ ਹੋਗੇ ਤੇਰੀ ਅਕਲ ਦਾ ਹੀ ਨਾਸ ਹੋ ਗਿਆ ਨਾਨਕ ਬਿਨ ਨਾਮੇ ਆਲੂਦਿਆ ਜਿੱਤੀ ਹੋਰ ਖਿਆਲ ਆਲੂਦਿਆ ਦਾ ਮਤਲਬ ਹੈ ਬੁੱਧੀ ਹੀਨ ਹੋ ਹਾਂਜੀ ਵਿਕਾਰ ਪੈਦਾ ਹੋ ਗਿਆ ਹਾਂ ਬਕਾਈ ਹੋ ਗਈ ਠੀਕ ਹੈ ਜੀ ਹੁਣ ਇੱਥੇ ਪਹਿਲੀ ਵਾਰ ਅੱਖਰ ਪਵੜੀ ਆ ਰਿਹਾ ਜੀ 12 पवड़ी हर जीओ, जा तू मेरा मित्र है ता क्या मैं काड़ा इतनी ठगी जग ठग गया सेहत तुद मारने वाला मेरा मित्र है वे तक तू मेरा मित्र है जब तू ही मेरा मित्र ता क्या मैं काड़ा बिदू और कीदी परवा मैं नु और की कोई लोड़ नहीं ਕਿਸੇ ਦੇ ਮਨ ਨੂੰ ਕੋਈ ਘਰਜ਼ ਨਹੀਂ ਜਿਹੜੀ ਧੰਗੇ ਜੱਗ ਠੱਗਿਆ ਜਿਹਨਾਂ ਠੱਗਾਂ ਨੇ ਜੱਗ ਠੱਗਿਆ ਹੋਇਆ ਨੂੰ ਨੇ ਠੱਗਿਆ ਹੋਇਆ ਲੋਭ ਨੇ ਠੱਗਿਆ ਹੋਇਆ ਮੋਹ ਨੇ ਠੱਗਿਆ ਹੋਇਆ ਕ੍ਰੋਧ ਨੇ ਠੱਗਿਆ ਹੋਇਆ ਤ੍ਰਿਸ਼ਨਾ ਨੇ ਠੱਗਿਆ ਹੋਇਆ ਆ ਜਿਹੜੀ ਦੁਨੀਆ ਦੀ ਵੜਿਆਈ ਹੈ ਇਹਨੇ ਠੱਗਿਆ ਹੋਇਆ ਸਾਲ ਦੀ ਦੌਲਤ ਮੈਂ ਇਕੱਠੀ ਕਰ ਲਾ ਇਹ ਬਾਹਰ ਨੇ ਠੱਗਿਆ ਹੋਇਆ ਸਉ ਤੋਂ ਮਾਦਰ ਨੇ ਵਾੜਾ ਉਹ ਬਕਾਰ ਅੰਦਰੋਂ ਮਾਰ ਕੇ ਦਵੇੜ ਤੇ ਉਹ ਬਕਾਰ ਅੰਦਰੋਂ ਮਾਰ ਕੇ ਦਵੇੜੇ ਕਰਤੇ ਉਹ ਜਿਹਨਾਂ ਬਕਾਇਆ ਮੇਰਾ ਉਹਨਾਂ ਨੂੰ ਸਾਰੇ ਬਕਾਰ ਤਰਸਤ ਕਰਤੇ ਠੀਕ ਹੈ ਜੀ ਗੁਰਮਤੀ ਸਬਰਸ ਭੋਗਦਾ ਵੱਡਾ ਆਖਾੜਾ ਗੁਰਪਾਵਜਲ ਪਾਰ ਲੰਘ ਆਇਆ ਸਤਗੁਰ ਨੇ ਪਾਵਜਲ ਤੋਂ ਪਾਰ ਕਰ ਦਿੱਤਾ ਜਿੱਤਾ ਪਾਵਾੜਾ ਉਹળે ਜੜ ਕੀ ਸੀ ਮਹਨਗੁਰ ਜਿੱਥੇ ਲਿਆ ਬੋ ਜਿੱਤਾ ਪਾਵਾੜਾ ਗੁਰਮਤਿ ਸਬਰਸ ਭੋਗਦਾ ਵੱਡਾ ਆਖਾੜਾ ਗੁਰਮਤਿ ਹੁਣ ਗੁਰਮਤਿ ਹੀ ਇੱਕ ਸੁਲਤਾਨ ਗੁਰਮਤਿ ਹੀ ਸਮਝਦਾ ਇਹਦੇ ਚ ਸਾਰੇ ਰਸਾਂ ਦਾ ਭੋਗ ਪੂਜਿਤ ਕਰਦਾ ਵੱਡਾ ਆਖਾੜਾ ਇਹੀ ਵੱਡਾ ਆਖਾੜਾ ਹੈ ਇਹਦੇ ਚ ਕੁੱਦਦਾ ਆ ਕੇ ਇਹਦੇ ਚ ਵਿਚਾਰ ਕਰਦਾ ਇੱਥਾਂ ਖੜਦਾ ਇੱਥੋਂ ਹੀ ਖਾਣਾ ਇਸੇ ਦਾ ਵਪਾਰ ਕਰਦਾ ਸਬ ਇੰਦਰੀਆਂ ਵਸਕਰ ਦਿੱਤੀਆਂ ਸਤਵੰਤਾ ਸਾੜਾ ਜਿਤ ਲਾਇਨ ਤਿੱਤੇ ਲੱਗਦੀਆਂ ਨਹਿ ਖਿੰਜੋ ਤੜਾ ਅੱਜ ਜਿੰਨੀਆਂ ਗਿਆਨ ਨੇ ਇਹ ਵਿਚਾਰੀਆਂ ਵਸ ਵਿੱਚ ਨੇ ਹੁਣ ਜਿੱਦੜ ਮੇਰੀ ਬੁੱਧ ਚਾਹੁੰਦੀ ਆ ਉਧਰ ਲੱਗਦੀ ਏਦਿ ਉਹ ਤਾਂ ਅੰਦਰ ਐ ਇਦਰੀਆਂ ਬੁੱਧੀ ਦੇ ਅੰਦਰ ਵਿਵੇਕ ਦੇ ਅੰਦਰ ਬੁੱਧੀ ਆ ਬੁੱਧੀ ਦੇ ਅੰਦਰ ਇਦਰੀਏ ਜਿਹਨਾਂ ਦੇ ਇੱਕ ਚਾਹੁੰਦਾ ਹੈ ਮਰੀਆਂ ਬੁੱਧੀ ਉੱਤੇ ਲੋੰਦੀਏ ਸਭ ਇੰਦਰੀਆਂ ਵਸ ਕਰ ਸਤਵੰਤਾ ਸਾੜਾ ਸਤਵੰਤਾ ਸਾੜਾ ਸਤਵੰਤਾ ਜਿਹੜਾ ਹੈ ਸਤਵੰਤਾ ਉਹਨੇ ਬਾਕੀ ਸਭ ਕੁਝ ਛਾੜਤਾ ਸਤਵੰਤਾ ਰਹਿ ਗਿਆ ਬਾਕੀ ਸਭ ਕੁਝ ਛੱਡ ਗਿਆ ਸਤਵੰਤੇ ਨੇ ਅੰਦਰੋਂ ਆਪਣੇ ਸਭ ਕੁਝ ਛਾੜਤਾ ਪਰਦੇਸੀ ਕੇ ਦਾਖਰੇ ਕਿਉਂ ਦੇਸ ਲਾਗਾ ਆਗ ਖਿਪਤਾ ਜਲ ਕੋਇਲਾ ਪਈ ਛਾਗੇ ਅੰਚਨ ਲਾਗ ਸੰਤੋਖ ਤੇ ਬਿਨਾਂ ਸਤ ਸਤੋਖ ਤੇ ਬਿਨਾਂ ਸਭ ਕੁਝ ਛੱਡਦਾ ਗੁਣ ਰੱਖਲੇ ਗੁਣ ਛੱਡਤੇ ਤੇ ਬਿਨਾਂ ਸਭ ਕੁਝ ਛੱਡਦਾ ਸਤ ਹੋ ਗਿਆ ਸਭ ਕੁਝ ਛੱਡ ਕੇ ਠੀਕ ਹੈ ਜੀ ਜਿਤ ਲਾਈਨ ਤਿੱਤੇ ਖਿੰਜੋ ਤਾਲ ਸਾਰੀਆਂ ਗਿੱਟੋ ਤਾਲਾ ਕਾਂ ਇੱਦਾਂ ਲਾਈ ਦਿਆਂ ਨੇ ਖਿੱਚੋ ਤਾਲਾ ਨਹੀਂ ਕਰਦੀਆਂ ਵੀ ਆਹ ਸੌਂਦੇ ਨੇ ਉਹ ਸੌਂਦੇ ਇਹਨਾਂ ਦਾ ਕੁਝ ਵੀ ਗਿਆ ਅਸਲ ਦੇ ਵਿੱਚ ਜਿਹੜਾ ਇਹਨਾਂ ਦੇ ਫਸਾਰ ਦਾ ਰਾਗ ਰੰਗ ਸੁਣਦਾ ਸੀ ਰਾਗ ਅਨੰਦ ਰੂਪ ਜਿਹੜਾ ਭੁੱਖ ਸੀ ਜਿਹੜੀ ਉਹ ਹੀ ਰਹੀ ਰਾਗ ਰੂਪ ਨਾ ਰੋਗ ਨਾ ਸੋਗ ਨਾ ਭੋਗ ਨੂੰ ਪਾਏ ਹੈ ਤੇ ਜਿੱਦ ਯਾਦ ਹਾਂ ਖਿਚੋ ਤਾੜਾ ਕਿਥੋਂ ਠੀਕ ਜੋ ਇੱਛੀ ਸੋ ਫਲ ਪਾਇੰਦਾ ਗੁਰ ਅੰਦਰ ਵਾਲਾ ਜੋ ਇੱਛੀ ਸੋ ਫਲ ਪਾਇੰਦਾ ਜਿਹੜੀ ਚਾਹੁੰਦੀ ਉਹ ਹੀ ਫਲ ਗੁਰ ਅੰਦਰ ਵਾਲਾ ਬਗੈ ਜਹਾਜ਼ੀਆਂ ਅੰਦਰੇ ਡੋਲਦੀਆਂ ਦੇ ਜੋ ਕੁਝ ਕਰਮ ਹੈ ਸੋ ਤੁਹਡ ਖਾਏ اور کسی کے تو مت برودن جائے اور کسے دی جانے دی لوڑ نہیں اپنا اندر کھوج جو گੁਰمکھ ٹوٹ اٹوں تے اے حال سچن لتو رام راجے درپ لگے سب کچھ سب کچھ گھر میں سارا کچھ گھر میں ہے باہر جانے دی لوڑ نہیں ਠੀਕ ਹੈ। ਨਾਲ ਜਿੱਥੇ ਉੱਕੜਾ 1 ਵਜੇ ਨਾਲ। ਹਾਂਜੀ। ਜੇ ਨਾਨਕ ਹੋਰ ਜਿਹੜਾ 1 ਵਜੇ ਨਾਲ ਦੇਟਾਰੀ ਹੈ। ਉਹ ਜਿਹੜਾ ਗੁਰ ਹੈ ਉੱਕੜ ਵਾਲਾ ਉਹ ਸਾਰਿਆਂ ਦੇ ਉੱਤੇ ਹੈ। ਗੁਰਤੁਠਾ ਨਾਨਕ ਨਾਲ ਦੇ ਉੱਤੇ ਗੁਰਤੁਠਾ। ਫੇਰੇ ਮੇਰੇ ਭਰਾਵੋ ਹਰ ਵਸਦਾ ਨੇੜਾ ਹਰ ਤਾਂ ਮੇਰੇ ਬਿਲਕੁਲ ਨੇੜੇ ਵਸਦਾ। ਹਰ ਇੰਨਾ ਨੇੜੇ ਵਸਦਾ। ਜਿੰਨਾ ਪੱਟ ਕਹਿੰਦੇ ਨੇ ਗੁਰ ਅਰਜਨ ਪ੍ਰਤਖ ਹਰ ਗੁਰ ਅਰਜਨ ਦੇ ਸਾਹਮਣੇ ਹਰ ਪ੍ਰਤਖ ਖੜਾ ਹੈ ਅਰਜਨ ਦੇ ਆਰ ਹਰ ਦੇ ਵਿਚਾਲੇ ਪੰਜਵੇਂ ਆਨਗਰਜਨ ਦੇ ਵਿਚਾਲੇ ਹਰ ਦੇ ਵਿਚਾਲੇ ਕੁਝ ਵੀ ਪਰਗਨਾ ਪੜਦਾ ਨਹੀਂ ਵਿਚਾਲੇ ਕੁਝ ਵੀ ਨਹੀਂ ਹਾਂਜੀ ਠੀਕ ਹੈ ਜੀ ਇੱਥੇ ਦਸਵੀਂ ਬੋੜੀ ਦੀ ਸਮਾਪਤੀ ਹੈ ਜੀ